ਸਰਬ ਧਰਮਾਂ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਸਰਬ ਧਰਮਾਂ ਵਿੱਚ ਸੇਹ ਧਰਮ ਕੀ ਹੈ ਸਰਬ ਧਰਮਾਂ ਦਾ ਮਾਨਾ ਧਰਮ ਕੀ ਹੈ ਕਰਨ ਬੇਰਨ ਵਿੱਚ ਜਦ ਜੀਆ ਧਰਮ ਸੰਤ ਸ਼ੂਰ ਦੇ ਬੋਲਿਕੇ ਆਪਣੀ ਆਪਣੀ ਵੱਤ ਆਪਣੀ ਆਪਣੀ ਮਰਿਆਦਾ ਆਪਣਾ ਸੰਸਾਰ ਜਿੱਤੇ ਮਰਿਆਦਾ ਬਦਲਦੇ ਧਰਮ ਬਦਲ ਜਾਂਦਾ ਧਰਮਾਂ ਬਦਲ ਜਾਂਦਾ ਕਰਨ ਕਾਂਡ ਬਦਲ ਜਾਂਦਾ ਜਿੱਤੇ ਜੋ ਕਰਨ ਕਾਂਡ ਬਦਲਿਆ ਤਾਂ ਗੁਰੂਤ ਹੋ ਗਿਆ ਰਸਾਲਾ ਬੋਲ ਗਿਆ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਕੀ ਹੈ ਹਰ ਕੋ ਨਾਮ ਜਪ ਨਿਰਮਲ ਕਰ ਹਰ ਕੋ ਨਾਮ ਜਪ ਹਰ ਕਾ ਨਾਮ ਜਪ ਜਮਾ ਹਰ ਕਾ ਜੋ ਗਿਆਨ ਹਾਸਲ ਕਰਦੇ ਹਰ ਕੌਣ ਜੇ ਹੋ ਜਾ ਕਿੱਥੇ ਰੰਗ ਉੱਥੇ ਤੱਕ ਤੈਨੂੰ ਪਹੁੰਚਿਆ ਜਾਊਗਾ ਕੈਸਾ ਰੂਪ ਹੈ ਕੈਸਾ ਰੰਗ ਹੈ ਇਹ ਸਭ ਜਿਹੜਾ ਕੰਮ ਹਸਲ ਕਰ ਬਣਦਾ ਨਿਰਮਲ ਕੰਮ ਇਹ ਜਿਹੜਾ ਕੰਮ ਇਹ ਕੰਮ ਕਰੇ ਮਨੋਤ ਜਲ ਲੈਣ ਦਾ ਕੰਮ ਕਰੇ ਇਹ ਨਿਰਮਲ ਕਰੂ ਇਹ ਮਾਇਆ ਤੋਂ ਪਰੇ ਦਾ ਕੰਮ ਬਾਹਿਆ ਦੇ ਅੰਦਰ ਦਾ ਕਰੂ ਜਿੱਥੇ ਮਾਇਆ ਸਰੀਰ ਨਾਲ ਜਿਹੜੇ ਸਭ ਕੰਮ ਉਹਦੇ ਨੂੰ ਦਰਮੰ ਨਹੀਂ ਆਗਿਆ माया कर तो ऊपर उठ के करनी। सगले कर पहला होंदे ने बडे ते बाद नी। ते क्रिया कर्म मारते पहला ही हो जांदे ने। जिरे पहला आ लो कोई पिछो कर लो। ओ पिछो करदे ते, ते पहेले ਦੁਆਜੀ ਇਹ ਨਾਲ ਕਰਨਾ ਵੀ ਆਪੇ ਹੈ ਜੀ ਦੁਆ ਕੇ ਮੈਂ ਕੋਈ ਚੰਗੀ ਘਰ ਬੰਦਾ ਹੀ ਗੱਲ ਦਾ ਆਪੇ ਉਹ ਭੁੱਲਾ ਹਰ ਸਰ ਪਾਵੇ ਆਪ ਹੀ ਵਾਜਣੇ ਉਹ ਪਹਿਲਾਂ ਵੀ ਪਾਏ ਹੋਏ ਨੇ ਫੁੱਲ ਦਾ ਫਹਿਣਾ ਇੱਥੇ ਹੀ ਛੜਦੇ। ਇੱਥੇ ਹੀ ਫੁੱਲਨੇ ਦਾ ਛੜਿਆ ਹੋਇਆ। ਉਹ ਜਿਹੜੇ ਬਾੜਾਂ ਦੇ। ਆਹ ਸਰੀਰ ਵਾਲੇ ਫੁੱਲ ਸਰੀਰ ਬੰਦੇ ਛੜਦਾ। ਹਾਂ। ਉਹਨਾਂ ਇਹ ਦੂਰੇ ਫੁੱਲ ਪਾਏ ਨੇ। ਫਲ ਕਾਰਨ ਫੁੱਲ ਨਹੀਂ ਵੱਧਦਾ। ਉਹ ਜਿਹੜਾ ਕਹਿੰਦਾ ਨਾ। ਹਾਂ। ਮੈਂ ਹਾਂ ਲੈ ਹੂੰ। ਆਣ ਦੇ ਬਗਲਾ ਹੁੰਦਾ ਉਹ ਸਾਰੇ ਫੁੱਲ ਤੇ ਦੇਰ ਹੋਰ ਕੁਝ ਨਹੀਂ ਛੜਦਾ ਦੇ ਫੁੱਲ ਦੇ। ਜਿਹੜੇ ਦੇਵਤਾਂ ਦੇ ਛੜਦਾ ਸੀ ਉਹ ਫੁੱਲੇ ਫੁੱਲ ਤੇ ਹੋਰ ਕੁਝ ਨਹੀਂ। ਇਹਨੇ ਛੱਡਾ ਰੱਖੀ ਸੀ ਨਾ ਜਿੱਥੇ ਜਿੱਥੇ ਉਹ ਬੁੱਲਵੇਂ ਬੁੱਲ ਤੇ ਦਾ ਵੀ ਹਾਂਜੀ ਸਗਲ ਕਿਰਿਆ ਮੈਂ ਉਤਮ ਕਿਰਿਆ ਸਗਲ ਕਿਰਿਆ ਮੈਂ ਉਤਮ ਕਿਰਿਆ ਜਿਹੜੀ ਸਗਲ ਸਾਰੀਆਂ ਕਿਰਿਆਵਾਂ ਨੇ ਉਹਨਾਂ ਉਤਮ ਕਿਰਿਆ ਅੱਗੇ ਸਾਰਾ ਸੰਗੀ ਦੁਰਮਤ ਮੰਨਿ ਗਿਰਿਆ ਆਪਣਾ ਇਹਦਾ ਮਾਨੈ ਨੂੰ ਸਾਧ ਲਓ ਸਾਰਾ ਸੰਗੀ ਦੁਰਮਤ ਮੰਨ ਆਪਣਾ ਇਹਦਾ ਸੰਗੀ ਮਾਨਾ ਨਾ ਜਿਹੜਾ ਨਾਲ ਹਰ ਵਕਤ ਰਹਿੰਦਾ ਇਹ ਸਾਧ ਲਓ ਠੀਕ ਕਰ ਲਓ ਆਸਟਰੋ ਦਰਮਾ ਦੀ ਜਿਹੜੀ ਬੈੜ ਹੈ ਇਹ ਨੂੰ ਦੂਰ ਕਰ। ਉਠੀ ਮਾਤਾ ਜਣੀ ਇਹਦਾ ਧਿਆਨ ਕਰ ਦੋ। ਜਿਹੜਾ ਹੁਕਮ ਦਾ ਵਿਰੋਧ ਕਰਦੀ ਐ ਦੁਰਮਸਤ ਕਰ। ਦੁਰਮਸਤ ਹੁਕਮ ਦਾ ਵਿਰੋਧ ਕਰਾਉਂਦੀ ਐ ਕਾਰ ਦੀ ਲੱਗਦਾ ਲੱਸੀ ਇਹ ਜਿਹੜੀ ਮੈਲ ਐ ਦੁਰਮਸਤ ਇਹ ਹਰੀ ਜਾਵੇ, ਅਦਰੋਂ ਉਹ ਸਾਫ ਹੋ ਜਵੇ, ਫਿਰ ਪਾਉਂਦਰ ਵਿੱਚ ਬਿਠਾ ਲੱਗਣਾ ਜਾਂਦਾ। ਉਹ ਜਿਹੜੀ ਮੈਲ ਐ ਉਰਜਵਾਰ ਜੀ ਕਹਿੰਦਾ ਕਿ ਆਹ ਮਨ ਕੋਲ ਲੀ ਗੱਲ ਕਰਕੇ ਉਹ ਬਹੁਤ ਤਾਂ ਹੀ ਕੋਲ ਲੀ ਨੇ ਉਹ ਬੈਠ ਜਿਹੜੀ ਆ ਨਾ ਵਿੱਚੋਂ ਕੱਢਦੇ ਨੇ ਪਹਿਲ ਫੇਰ ਕਹਿੰਦੇ ਨੇ ਵੀ ਨਵਾਜ ਮਿੱਠੀ ਰੱਖੂਗੀ ਕਰਦੇ ਉਹ ਵੀ ਇਹੀ ਕੰਮ ਦੇ ਅਬੂ ਸਾਹਿਬ ਸੂਖ ਨਹੀਂ ਕਰਦੇ ਲੋਕ ਬੜਾ ਟੇਸ ਹੁੰਦਾ ਪਹਿਨਾ ਤੇ ਸਹੀ ਕਰਦੇ ਨਾ ਨੋਰਮਲ ਜਿਹਾ ਟੇਸ ਹੋ ਜਾਂਦਾ ਵੀ ਹੁਣ ਸਾਡੀ ਬਿਠਾਈ ਰਹੀ ਉਹ ਬਿਠਾ ਬਿਲਕੁਲ ਨਹੀਂ ਲੱਗਦਾ ਬਿਠਾ ਦਾ ਬਹੁਤ ਲੱਗਣਾ ਬਹੁਤ ਨੂੰ ਗਾਲੂ ਲੱਗਣਾ ਬਾਤ ਨੂੰ ਪਿਛਾ ਲੱਗਾਇਆ ਹੈ ਬਾਣੀ ਨੇ। ਕਿਆ ਮਨੂ ਦੀ ਗੱਲ ਕੌੜੀ ਲੱਗਦੇ। ਸਰੀਰ ਤੇ ਵਿਚਾਰ ਕਰਦਾ ਹਾਂ ਕਿ। ਹਾਂਜੀ। ਸਗਲ ਉਤਮ ਹੈ ਉਦੋਂ ਭਲਾ। ਹਰ ਕਾ ਨਾਮ ਜਪੋ ਜੀ ਆ ਲੈ ਰੋਗ ਨੂੰ ਉਤਮ ਰਖ ਲੋ ਜਾਂ ਕਿਰਿਆ ਰਖ ਲੋ ਜਾਂ ਕਰਮ ਰਖ ਲੋ। ਫਿਰ ਉਦੋਂ ਵੀ ਕਹਿਤਾ ਚਲੋ। ਇਹ ਉਦਮ ਕਰਨਾ ਸਾਰਿਆਂ ਨੂੰ ਚੰਗਾ ਉਦੋਂ ਕਿਹੜਾ ਭਲਾ ਉਦੋਂ ਕਿਹੜਾ। ਸਗਲ ਉਤਮ ਹੈ ਉਦੋਂ ਭਲਾ। ਹਰ ਨਾਮ ਜਪੋ ਜੀ ਆ ਬਾਹਰ ਕਾ ਨੂਰ ਜੋਬੋ ਉਬੂਰਾ ਜਨਾ ਇੱਕ ਪਾਸੇ ਹੱਥੇ ਇੱਕ ਪਾਸੇ ਦਸ਼ੀਰ ਪਰ ਤੋਹੀ ਜਾਓ ਜੀ ਸਭਾ ਪਹਿਲੇ ਟੁਕਾ ਪੇਵੇਂ ਸੀ ਗਾਨੀ ਇਹ ਦਿਮਾਗ ਦੇ ਮਦਾਨੇ ਨੂੰ ਚਲਾਈ ਜਾਓ ਜਦੋਂ ਜੀ ਸਦਕ ਆਈਏ ਸਭ ਦੇ ਵਿਚਾਰ ਲਗਾਤਾਰ ਕਰਦੇ ਹੀ ਰਹੋ ਦੁਬਟੇ ਹੈ ਵਿਲੇ ਨਾ ਰੋਹੋ ਇਹ ਹੀ ਆ ਉਹ ਤੁਮ ਗਲਦਿਆਂ ਜੀ ਉਹ ਸੁਆਗਦਾਂ ਪੁੱਜੇ ਪੁੱਜੇ ਇਹਦਾ ਕੋਈ ਨਾਮ ਦੀ ਨਾ ਹੋਈ ਜਾਂ 11 ਨਾਲ ਹੋਈ ਚ ਫਿਰ ਅੱਗੇ ਕੀ ਹੈ ਧਿਆਨ ਤੇ ਆਉਂਦੇ ਆ ਪ੍ਰਭੂ ਤੇ ਆ ਤੇ ਅੱਗੇ ਅਰਲੀ ਸਟੇਜ ਤੇ ਆਹਨੇ ਆਪਰਾ ਮਿਲ ਨਾਂ ਪੁੱਤਰੀ ਚੰਨ ਜਨ ਬੋਤ ਨੇ ਸੰਤਾ ਜਾਏ ਮਡੇ ਅੰਤਾਰੇ ਇਹ ਤਾਂ ਸਾਰੇ ਬਡੇ ਪਰ ਦੋ ਵੀ ਬਥੇਰੇ ਨੇ ਦੋ ਵੀ ਥੋੜੀ ਮੁਕਤੀ ਦਾਕ ਤਾਂ ਮਿਲ ਗਿਆ ਨਾ ਮੁਕਤੀ ਤੱਕ ਇਹ ਦੌੜ ਐ ਨਹੀਂ ਹੁੰਦਾ ਇਹ ਵੀ ਗਾਮ ਹਾਂਜੀ ਸਗਲ ਬਾਣੀ ਮੈਂ ਅਮਰਤ ਬਾਣੀ ਹਰ ਕੋ ਜਸ ਸੁਣ ਬਾਣੀ ਮੈਂ ਬਾਣੀ ਅਮਰਤ ਬਾਣੀ ਹਰ ਕੋ ਬਹੁਤ ਬਹੁਤ ਲੋਕਾਂ ਨੇ ਬਾਣੀ ਨੂੰ ਬਾਣੀ ਗੜੀ ਦੇ ਸਰੂਪ ਮੈਂ ਹਰ ਕੋ ਜਸ ਸੁਣ ਹਰ ਕੋ ਦੇ ਸੁਣੀ ਇਹ ਸੁਣੀ ਹਰਕਾ ਹਰਕੋ ਜਸੁੜੀ ਰਸਨ ਕੋ ਖਾਣੀ ਇਹ ਹੀ ਬੋਲੀ ਰਸਨ ਇਹਦਾ ਬਚਨ ਜੀ ਅੰਮਰਤ ਪਾਨੀ ਇਹਦੀ ਅੰਮਰਤ ਪਾਨੀ ਉਹ ਆ ਜਿੱਦ ਤੇ ਕਿ ਤੂੰ ਬਰੰਟੂ ਹੋਏ ਨੀ ਚਲਦਾ ਜਿਹੜਾ ਅਦਿਵਿਸ਼ਚੀ ਹੈ ਪਹਿਲਾਂ ਵੀ ਸੱਚੀ ਸੀ ਗੁਰੂ ਵੀ ਸੱਚੀ ਆਂ ਗੁਰੂ ਵੀ ਸੱਚੀ ਜਿਹੜੀ ਇਤਨਾ ਕਹਾਂ ਕਿ ਸੱਚੀ ਬਾਣੀ ਏ ਉਹ ਬਿਲਕੁਲ ਓਦੀ ਬਰਤੀ ਹੋਣੀ ਤੇ ਝੂਠੀ ਸਾਹਿਬ ਤੋਂ ਉਹ ਬਰਦੀ ਝੂਠੀ ਸਾਹਿਬ ਤੋਂ ਵੀ ਖਤਮ ਹੋਉਂਦੀ ਜੇ ਝੂਠੀ ਨਹੀਂ ਸਾਹਿਬ ਤੋਂ ਸਕਦੀ ਕੋਈ ਇਤਨਾ ਨਹੀਂ ਹੋਉਂਦੀ ਸਬਰਤ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੇ ਕੱਟ ਬਸੇ ਹਰੀ ਨਾਮ ਇਹ ਥਾਨ ਹੈ ਸਰਲ ਥਾਂ ਤੇ ਉੱਤਮ ਉਹ ਉੱਤਮ ਸੁਣਾ ਨਾਨਕ ਜੇ ਘਟ ਵਸੇ ਹਰੇ ਨਾ ਫਿਰ ਉਹ ਅੰਮ੍ਰਿਤ ਵਰਦਾ ਵਾਲਾ ਥਾਣਿਆਂ ਬਸਰਾ ਵਾਲਾ ਕਮਲਤਮ ਹੋ ਗਏ ਉੱਤਮਤਾ ਹੈ ਘਟ ਦੀ ਗੱਲ ਇਹ ਘਟ ਸੇ ਚੱਲ ਆਈ ਹੈ ਹਰ ਨਾਮ ਪੁੱਠਾ ਗੜਾ ਦੇਸਾ ਪੁਰਤੋ ਨੀ ਨੀ ਮੇ ਹਿੱਦਦਾ ਹੀ ਹੋਊਗਾ ਜੈਨ ਬਾਹੂ ਵੀ ਹੋ ਤੁਮੋ ਇਦਾਂ ਹੀ ਘੱਟਿਆ ਹੋ ਜਾਵੇ ਇਹਦਾ ਹੀ ਹੋਊਗਾ ਹੋਊਗਾ ਹੋਊਗਾ ਕੋਈ ਹੈ ਸੀ ਉਹੀ ਪੂਜੀ ਜਾਂਦਾ ਮਾੜੇ ਸੀ ਮਾਤਾ ਰਾਣੀ ਪੱਕੀ ਮਾੜੇ ਸੀ ਉਧਾਨ ਕੀ ਬਾੜੇ ਸੀ ਮਰੇ ਵਧੀਆ ਬਾੜਾ ਨੇ ਬਣੇ ਵਜੇ ਅਗਰ ਥਾਨ ਤੇ ਉਹ ਉਤਮ ਥਾਨ ਹੈ ਉਤਮ ਥਾਨ ਨਾਨਕ ਜੇ ਘਟ ਬਸੇ ਹਰਿ ਤੋ ਜਿਤੇ ਆ ਨਾਮ ਬਸੇ ਉਤਮ ਹੈ ਚਲ ਜੇ ਉੱਥੇ ਵੀ ਬਸਦਾ ਹੋਵੇ ਉਤਮ ਸੀ ਬੋਲਣ ਦੇ ਹੋ ਪਰ ਉਤੋਂ ਬਰਦਾਸ਼ੀ ਹਾਂ ਤੇ ਥੋੜਾ ਜੀਵਨ ਖਰਾਬ ਜਿੰਨੇ ਬੱਲੇ ਆਂਦੇ ਨੇ ਉਹ ਰੋਜ਼ 24 ਘੰਟੇ ਜੀਵਨ ਵਿਗੜੇ ਹੋਏ ਜੀ ਤੂੰ ਵਿਗੜਦੇ ਕਿਉਂ ਨਹੀਂ ਚਰਮ ਸਾਤ ਤੱਕ ਜੀਵਨ ਵਧਣਾ ਚਾਹੀਦਾ ਵਿਗੜਨਾ ਤਾਂ ਚਾਹੀਦਾ ਇਹਦਾ ਮਤਲਬ ਹੈ ਜਿਵੇਂ ਕਾਲਜਾਂ ਦੇ ਵਿੱਚ ਗੁੱਟਾ ਕਰਦੀ ਹੋਈ ਹੋ ਜਾ ਇਲੈਕਸ਼ਨ ਹੁੰਦੇ ਨੇ ਕਾਲਜਾਂ ਦੇ ਵਿੱਚ ਆਇਆ ਉਸ ਤੇ ਬੈਠਾ ਕੌਲੀਆ ਸਾਡਾ ਆਹ ਜਿਹੜਾ ਚੌਧਰ ਨੇ ਬਾਇਆ ਦੇ ਪ੍ਰੋਡਕਸ਼ਨ ਤੇ ਸਬਪੋਲਿਟਿਕਸ ਹੈ ਤੇ ਉਹ ਗੁੰਡਾਗਰਦੀ ਕਰਦਾ ਸੀ ਉਹ ਤੇ ਜਿੰਨ ਖਰਾਬ ਹੋਣਾ ਹੈ ਅੰਦਰ ਪੜਨੇ ਨੂੰ ਤੇ ਬਾਹਰ ਨਿਕਲੂਗੀ ਕੋਡਿੰਗ ਚੱਕੂ कि जीव तो घरा में हो ठीक मन वो भी कामीले बे बाहर ले करन कि ये कुछ हो रहा है वो जेड़ा सी ओद भी कुछ हो रहा है पढ़ाई दो घंटे दोए पाड़वा आते थी और तब जगह है बनते पर जे वो कट उठे बसे हर लोग ਜੇ ਕਿਸੇ ਦੇ ਘਟ ਜਾ ਮਨ ਉੱਥੇ ਬਸੇ ਚਲੋ ਇਹ ਬੰਦਨ ਨਹੀਂ ਅਸੀਂ ਅੱਥ ਉਹ ਵੀ ਤਾਂ ਉੱਤਰ ਕੇ ਕਿ ਉੱਥੇ ਕਿਸੇ ਦੇ ਜਾਇਦੇ ਬੈਠੇ ਤੇ ਸੁਣਦੇ ਹਮ ਬੱਜਵੇ ਤਾਉਂ ਉਹ ਤਾਂ ਉੱਤਮ ਲੱਗੇ ਅਸੀਂ ਚਲੋ ਮਹਾਰਾਜ ਪਰ ਇਹ ਵੀ ਹੋ ਜੀ ਰਿਹਾ ਜੀਵਨ ਲੋਕਾਂ ਦਾ ਬੀਜ ਹੈ ਉਹਨਾਂ ਦਾ ਖੁੱਜੇ ਤਾਂ ਉਹ ਵੀ ਬੀਜ ਬੀਜ ਰਿਹਾ ਹੈ ਫੇਰ ਉਹ ਜਗਾ ਦੀ ਇੰਪੋਰਟੈਂਸ ਲੋਕਾਂ ਦੇ ਬਰਬਰੋਤ ਨਹੀਂ ਆ ਗਈ ਤੁਸੀਂ ਫਿਰ ਦੱਸੋ ਉਹ ਨਾਲ ਦੇ ਨਹੀਂ ਮਤ ਹੈਗੀ ਸਿਰਫ ਮਾਇਆ ਲੋਕਾਂ ਦਾ ਮਣੀ ਮੋਟੀ ਭੇੜ ਵੀ ਹੋ ਗਿਆ ਉਹਨਾਂ ਦਾ ਕੋਈ ਲੋਕਾਂ ਦੇ ਵੀ ਮਣੀ ਮੋਟੀ ਹੋਈ ਆ ਹੁਣ ਸਹੀ ਗੱਲ ਹੈ ਹਾਂ ਕੋਤੌੜ ਰੋਜ਼ਾ ਤਾਰ ਕੋਲ ਜੋ ਲੋਨ ਜਾਂਦੇ ਉੱਥੇ ਜਾਣਾ ਨਹੀਂ ਲੈਟ ਜਾਦਾ ਧਿਆਨ ਦੀਆਂ ਬੱਸਾਂ ਜਾਂਦੀਆਂ ਨੇ ਐਤਵਾਲ ਮਰੇ ਨੂੰ ਦੇ ਦੇ ਬਤਿਨ ਉਹ ਰੋਹ ਜਾਂਦੇ ਨੇ ਤੁਹਾਡੀ ਬਾਤ ਰਿਕ ਰਿਕ ਆਹ ਤੁਹਾਡੀ ਬਾਤ ਰਿਕ ਰਿਕ ਉਹ ਸਨੀ ਕਾਹ ਕਰਦੇ ਨਿਜ਼ਮ ਬਣਾ ਲੈ ਨਿਜ਼ਮ ਦੀ ਗੱਲ ਆ ਉਹ ਫਿਰ ਕੋਈ ਕਥਾ ਕੋਈ ਕੁਝ ਲੋ ਕਹਿੰਦੇ ਉਹ ਤੇ ਦੀ ਗੱਲ ਕਰਦੇ ਲੋਕਲ ਦੀ ਗੱਲ ਕਰਦੇ ਇਹ ਲੰਦਰ ਦੀ ਕੋਈ ਗੱਲ ਕਰਦੂ ਨਾਲ ਮੈਂ ਜੀ ਦੇ ਉਹ ਬਣਾ ਦਿਓ ਤਾਂ ਕੋਈ ਨਹੀਂ ਲੰਦਰ ਨਾ ਆਉਣ ਵਾਲਾ ਨਾ ਹੁੰਦੇ ਰਹਿਣ ਵਾਲਾ